ਹੁਣ ਆਪਾਂ ਅਗਲਾ ਉਪਦੇਸ਼ ਜਿਹੜਾ ਹੈਗਾ ਜੀ ਟੱਡੇ ਅੱਖਰ जी ਜੀ ਪਹਿਲਾਂ तो ਤੋਂ ਪਹਿਲਾਂ ਭਗਤ जी ਜੀ ਦਾ ਉਪਦੇਸ਼ ਹੈ ਜੀ 20ਵੀਂ ਪੌੜੀ 'ਚ ਟੱਡਾ ਢਿਗ ਢੂੰਡ ਕਤ ਆਨਾ ਢੂੰਡਤ ਹੀ ਟਹਿ ਗਏ ਪ੍ਰਾਨਾ ਟੱਡਾ ਢਿਗ ਢੂੰਡ ਕਤ ਆਨਾ ਕੋਈ ਆਪਣੇ ਕੋਈ ਹੁੰਦਾ ਬੋੜ ਦੇ ਕੋਲ ਅਰਵੇ ਵਾਜ ਟੁੱਲਦੀ ਚਹਿਰੇ ਪਰੋ ਬਟ ਟੁੱਲਦੀ ਸਾਰੇ ਸਮਝ ਲੋ ਮਰ ਜਾਂਦਾ ਮਨ ਲੀਨ ਹੋ ਜਾਂਦਾ ਐ ਪਾਣੀ ਚੱਲਿਆ ਹੁੰਦਾ ਚੱਲਿਆ ਹੁੰਦਾ دریا ਇੱਕ ਪਾਣੀ ਦੂਏ ਖੜੇ ਪਾਣੀ ਨੂੰ ਮਿਲ ਜਾਂਦਾ ਉਹਦੇ ਵਿੱਚ ਹੀ ਜਦ ਲੀਨ ਹੋ ਜਾਂਦਾ ਮਿਲਦੀ ਸਾਰੇ ਇਉ ਮੰਨੂ ਕਿ ਲਾਇਬਾਨ ਨਾ ਆਪਣੇ ਮੂੜ ਜਾਂਦੇ ਜਦ ਵਿੱਚ ਸਮਾ ਜਾਂਦਾ ਚਹਿਰੇ ਇਸ ਤਰ੍ਹਾਂ ਪ੍ਰਾਣੀ ਹੈ ਜਿਹੜਾ ਪ੍ਰਾਣੀ ਹੈ ਮਨ ਇਹ ਵਿੱਚ ਹੀ ਚੜ ਸੁਮੇਰ ਢੂੰਡ ਜਦ ਆਵਾ ਜਹ ਗੜ ਗੜਿਓ ਸੋ ਗੜ ਮਹਿ ਜਾ ਬਾਬਾ ਜਦ ਮੈਂ ਤਿਰਕੁਡੀ ਦੇ ਸਵੇਰ ਪਰਬਤ ਤੇ ਢੂੰਡਦਾ ਹੁੰਦਾ ਸੀ ਨਾ ਜਾਂ ਤਾਂ ਮਿਲਿਆ ਨਹੀਂ ਜਦ ਮੈਂ ਉੱਥੇ ਵਾਪਸ ਆ ਗਿਆ ਥੱਲੇ ਢੂੰਡਣ ਲੱਗ ਗਿਆ ਫਿਰ ਦੇ ਵਿੱਚ ਗੜ ਚ ਜਦੋਂ ਕੜ ਕੜਿਓ ਕਹਿੰਦੇ ਜੀ ਨਾ ਹਿਰਦਾ ਬਣਾਇਆ ਸੀ ਇਹ ਆ ਪ੍ਰਕਾਸ਼ ਰੋਸ਼ਨੀ ਜਿਹੜਾ ਪ੍ਰਕਾਸ਼ ਸੀ ਅੰਦਰ ਜਿਹੜੀ ਰੋਸ਼ਨੀ ਸੀ ਮੈਂ ਉਹ ਤਾਂ ਉਹਦੇ ਰੋਸ਼ਨੀ ਦੇ ਵਿੱਚ ਹੀ ਸੀ ਜਦ ਕੜ ਕੜਿਓ ਉਸੇ ਕੜ ਮੈਂ ਫਾਪਾ ਉਹ ਤਾਂ ਰੋਸ਼ਨੀ ਦੇ ਵਿੱਚ ਹੀ ਮੜ ਗਿਆ ਮਨ ਮੈਂ ਆਪ ਉਹਦੇ ਵਿੱਚੋਂ ਹੀ ਆਪ ਮਿਲਿਆ ਯਾਦ ਮੈਂ ਜੋਤ ਤੇ ਸਰੀਰ ਦੇ ਵਿੱਚ ਜਿਹੜੀ ਜੋਤ ਸੀ ਜੋਤ ਮਿਲ ਜਾਂਦਾ ਜੋਤ ਦੇ ਵਿੱਚ ਹੀ ਜਾਣ ਲੈ ਗਏ ਜੀ ਕਹਿੰਦੇ ਉਹ ਤਾਂ ਜੋਤ ਦੇ ਵਿੱਚ ਹੀ ਸੀ ਬਾਹਰ ਟੁੱਟਦਾ ਫਿਰਦਾ ਸੀ ਇਹਨੂੰ ਜੋਤ ਜਰੂਰ ਬਾਹਰ ਹੈ ਫਰੋਜੋਦ ਦੇ ਵਿੱਚ ਹੀ ਆ। ਊਰਜਾ ਆਪਣੀ ਦੇ ਵਿੱਚ ਹੀ ਹੁੰਦਾ ਹੈ। ਬਲਬ ਆਪਣੀ ਰੋਸ਼ਨੀ ਦੇ ਵਿੱਚ ਹੀ ਹੁੰਦਾ ਹੈ। ਸਮੇਰ ਦੇ ਆ ਕੇ ਆਪਣੇ ਅੰਦਰੋਂ ਮਿਲ ਗਿਆ। ਤੇਰੀ ਗੁੱਡੀ ਕਿੱਥੇ ਮਿਲਿਆ ਕਹਿਣ ਦਾ ਮਤਲਬ ਹੈ। ਤੇਰੀ ਸਮੇਰ ਹੈ। ਜਦੋਂ ਉੱਥੋਂ ਮੁੜ ਕੇ ਅੰਦਰ ਨੂੰ ਆਇਆ ਥੱਲੇ ਨੂੰ ਗਰਵਾਨ ਜੀ ਨੂੰ ਦੇਖਿਆ ਉੱਥੋਂ ਮਿਲ ਗਿਆ। ਠੀਕ ਹੈ ਜੀ ਹਿਰਦੇ ਚੋਂ ਪ੍ਰਾਪਤ ਹੋਇਆ ਜੀ। ਇਹ ਸੀ 20ਵੀਂ ਪੌੜੀ ਦਾ ਉਪਦੇਸ਼ ਭਗਤ ਕਬੀਰ ਜੀ ਦਾ ਹੁਣ ਹੈ ਜੀ ਗੁਰੂ ਨਾਨਕ ਸਾਹਿਬ ਜੀ ਦਾ ਢੱਡੇ ਅੱਖਰ ਤੋਂ ਉਪਦੇਸ਼ 17ਵੀਂ ਪੌੜੀ ਦਾ ਜੀ ਢੱਡੇ ਟਾਹੇ ਉਸਾਰੈ ਆਪੇ ਜਿਉਂ ਤਿਸ ਭਾਵੈ ਤੇ ਕਰੇ ਢੱਡਾ ਕਾਹੇ ਉਸਾਰੈ ਆਪੇ ਉਹ ਕਹਿੰਦੇ ਢੌਂਦਾ ਵੀ ਆਪ ਹੈ ਉਸਾਰਦਾ ਵੀ ਆਪ ਚਾਹੇ ਮਾਇਆ ਕਰਕੇ ਚਾਹੇ ਬੰਦ ਕਰਕੇ ਮਨ ਦੀ ਉਹ ਰੋਸ਼ਨੀ ਵੀ ਪੈਦਾ ਕਰਦਾ ਹੈ ਮਨ ਦੀ ਰੋਸ਼ਨੀ ਖਿੱਚ ਵੀ ਆਪੇ ਲੈਂਦਾ ਚਾਹੁੰਦਾ। ਚਾਹੇ ਉਹ ਆਪੇ ਜੋ ਆਵੇ ਤੇ ਮੈਂ ਕਰੇ। ਜਿਵੇਂ ਉਹ ਚਾਹੁੰਦਾ ਉਹ ਕਰਦਾ ਉਹਦੀ ਮਰਜ਼ੀ ਅਜਿਵੇਂ ਉਹ ਕਰਦਾ। ਢਾਗ ਵਿੱਚ ਆਇਓ ਸਾਰਨ। ਠੀਕ ਹੈ ਜੀ ਇਹ ਇਹ ਭੰਨੀ ਘੜੀ ਸਵੰਨਵੀ ਵਾਲਾ। ਨਾ ਇਹ ਹੈਗਾ ਜਮਲ ਵਰਨਾ ਮੁਕਮਲ। ਅੱਛਾ ਜੀ। ਤਾਂ ਪੈਦਾ ਕਰਨਾ ਜੋਤ ਨੂੰ ਆਪਣੇ ਵਿੱਚ ਲੀਡ ਕਰ ਲੈਣਾ। ਫਿਰ ਸ਼ਬਦ ਗੁਰੂ ਦੀ ਗੱਲ ਹੈ ਜੀ। ਹੋ ਜੀ ਠੀਕ ਹੈ ਜਿਉਂ ਤੇ ਸੁਭਾਵ ਹੈ ਤਿਵੇਂ ਕਰੇ ਹੋ ਜੀ ਕਰ ਕਰ ਵੇਖੈ ਹੁਕਮ ਚਲਾਏ ਤਿਸ ਨਿਸਤਾਰੈ ਜਾ ਕੋ ਨਦਰ ਕਰੇ ਕਰ ਕਰ ਵੇਖੈ ਜੇ ਜੀਪ ਜਿੰਨੇ ਪੈਗਾ ਕਰ ਦੇ ਨੰਗਾ ਵੀ ਰੱਖ ਹੁਕਮ ਚਲਾਏ ਹੁਕਮ ਵੀ ਕਰਾਉਂਦਾ ਉਹਨਾਂ ਤੇ ਹੁਕਮ ਚਲਾਏ ਤਿਸ ਨਿਸਤਾਰੈ ਜਾ ਕੋ ਕਰੇ ਹਾਂ ਜੀ ਤੇ ਹੋ ਜਾਂਦੀ ਔਰੂ ਬਰ ਕੜ ਲੰਦ ਜਿਹੜਾ ਹੈ ਪਾਕਿਸਤਾਨ ਦੇ ਚੋਂ ਬਾਹਰ ਕੜ ਲੰਦ ਪਰਬਦੇ ਆਡੇ ਦੇ ਨਸਾਰੇ ਬੰਦ ਪਰਬਦੇ ਆਡੇ ਦੇ ਜੀ ਦਾ ਕੋਈ ਉਪਦੇਸ਼ ਨਹੀਂ ਜੀ ਪੌੜੀ ਨੰਬਰ 30 ਚੋਂ ਸਾਹਿਬ ਵੱਲੋਂ ਉਪਦੇਸ਼ ਹੈ ਜੀ ਪੌੜੀ ਟਡਾ ਢੂੰਡਿਤ ਕਹਿ ਫਿਰੋ ਢੂੰਡਨ ਈਆ ਮਨ ਮਾਹੇ ਸੰਗੀ ਤੁਹਾਰੇ ਪ੍ਰਭ ਬਸੈ ਬਨ ਬਨ ਕਾਹ ਫਿਰਾਹ ਹੈ ਟੱਡਾ ਤੋੜ ਤਾ ਕਾਹ ਫਿਰੋ ਉਪਕੇ ਕਾਹ ਤੋੜਦੇ ਫਿਰਦੇ ਬਾਹਰ ਟੁੱਟਣ ਰਿਹਾ ਬੰਦ ਮਾਹੇ ਜੇ ਟੁੱਟਣਾ ਹੈ ਤਾਂ ਮਨ ਚ ਟੁੱਟੋ ਟੁੱਟਣ ਤਾਂ ਇਹ ਮਨ ਦੇ ਵਿੱਚ ਟੁੱਟਣਾ ਦੇ ਵਿੱਚ ਜਿਹੜਾ ਟੋੜਣਾ ਤਾਂ ਹੰਦੇ ਵਿੱਚ ਸੰਗਤ ਆਰੇ ਪ੍ਰਭ ਸੇ ਤੁਹਾਡੇ ਨਾਲ ਹੀ ਬਸਦਾ ਬਾਹਰ ਕਿੱਥੇ ਆਹੋ ਬਲਬਲ ਕਾਹ ਫਰਾਹ ਹੈ ਕੀ ਕਰ ਨੂੰ ਖਿਲਦਿਆਂ ਚੰਗੜਾ ਵਿੱਚ ਬਣ ਬਣ ਦੇ ਵਿੱਚ ਕੀ ਕਰਦੇ ਫਿਰਦੇ 12 ਸਟੋਲ ਦੇ ਫਿਰਦੇ ਅੰਦਰ ਆ ਤੁਹਾਡੇ ਹਾਂਜੀ ਤੇਰੀ ਟਾਹੋ ਸਾਧ ਸੰਗੀ ਅਹੰਗ ਬੁੱਧ ਬਿਕਰਾਲ ਸੁਖ ਪਾਵੋ ਸਹਜੇ ਬਸੋ ਦਰਸ਼ਨ ਦੇਖ ਨਿਹਾਲ ਇਹ ਜਿਹੜੀ ਤੁਸੀਂ ਕਹਿੰਦੇ ਹੋ ਨਾ ਆਹ ਬੁੱਧ ਜਿਹੜੀ ਵੀ ਉਹ ਬਾਹਰ ਆਏ ਉੱਥੇ ਹੈ ਦੀਰ ਸਾਡੇ ਜਿਹੜੇ ਸਾਖੀਆਂ ਬਣਾਈ ਹੋਈਆਂ ਨੇ ਉਹ ਬੁੱਧ ਦੀ ਸਰਕਾਰੀ ਦੀ ਬੁੱਧ ਦੀਆਂ ਸਾਰਤਾ ਦੀ ਬੁੱਧਤੀ ਜਿਹੜੀ ਆ ਘੜੀ ਹੋਈ ਹੈ ਸਾਖੀਓ ਇਹਨਾਂ ਦੀ ਢੇਰੀ ਟਾ ਦੇ ਉਹ ਬਾਰ ਹੁੰਦਾ ਮੰਨ ਲਓ ਸੰਗ ਸਾਧ ਜੁੜ ਜਾਓ ਢੇਰੀ ਟਾ ਲੋ ਤੁਹਾਡੇ ਕੀਤਾ ਹੈਗਾ ਹਨ ਬੁੱਧ ਬਕਰਾਲ ਆ ਬਹੁਤ ਖਤਰਨਾਕ ਬਕਰਾਲ ਹੈ ਇਹ ਪਟਾ ਪਟਾਲ ਦੂਏ ਨੇ ਸਾਰੇ ਪੂਰਾ ਦੇ ਪੂਰ ਡੋਬੀ ਜਾਂਦੀ ਹੈ ਇਹਦੀ ਢੇਰੀ ਟਾ ਲੋ ਜੋ ਇਹ ਕਹਿ ਰਹੀ ਹੈ ਉਹ ਕਹੋ ਵੀ ਇਹ ਸਾਰਾ ਝੂਠ ਬੋਲਦੀ ਹੈ ਸਾਰੇ ਗਰਾਂ ਤਨੂ ਝੂਠੇ ਮੰਨ ਲੋ ਇਹਨਾਂ ਦੀ ਢੇਰੀ 'ਤੇ ਤਾਕ ਫਰੇ ਕਰੋ ਤੋ ਖੰਪਾਵੋ बसो ਬਸੋ ਫਰੇ ਸੁਕੇ ਸੁਖਾ ਟਿਕਾਓ ਹੋ ਜਾਊਗਾ ਸਹਜ ਅਵਸਥਾ ਹੋ ਜਾਊਗੀ ਤੁਸੀਂ ਬਸੋਗੇ ਦਰਿਆ ਦੇਖਦੇ ਹਾਂ ਪਰਸ਼ਨ ਵੀ ਹੋ ਜਾਣਗੇ ਅੰਦਰੋਂ ਨਿਹਾਲ ਵੀ ਹੋ ਜਾਊਗੀ ਮਨ ਵੀ ਖੜ ਜਾਊਗਾ ਹਾਂਜੀ ਤੇਰੀ ਜਮ ਹੈ ਜੰਮਰ ਯਾ ਜੇ ਜਮ ਬਰ ਹੈ ਠੇਰੀ ਜਾਵੇਂ ਜੰਮੀ ਜੰਮੀ ਜਮੀ ਬਰ ਹੈ ਜਬ ਜਬਣ ਵਾਲੇ ਇਦੇ ਵਿੱਚ ਜਮੀ ਦਾ ਮਨ ਜਨਮ ਮਾਰ ਰਹੀ ਦੇ ਵਿੱਚ ਮਰਾਂ ਇਹ ਲਫਜ਼ ਮਰੇ ਦੀ ਮਰਾਂ ਜਬ ਵੀ ਮਰਾਂ ਜਬ ਤੇ ਮਰਦਾ ਹੈ ਜੀ ਦੇ ਵਿੱਚ ਤੂੰ ਛਾ ਮੈਂ ਜੀ ਦੇ ਵਿੱਚ ਜੀ ਦੇ ਕਾਣੋ ਠੇਰੀ ਕਾਣ ਦੀ ਜਬ ਜਮਣ ਵਾਲਨ ਹੈ ਤੂੰ ਗਰਭ ਜੋਨੀ ਦੁੱਖ ਪਾਏ ਇਹਦੇ ਕਰਕੇ ਗਰਭ ਜੋਨੀ ਮਿਲਦੀ ਹੈ बार-बार ਹਾਂ ਜੀ ਸਭਾ ਸਾਹਿਬ ਜੀ ਤੇਰੀ ਜਮੀ ਮਰਾਂ ਗਰਭ ਜੋਨੀ ਦੁੱਖ ਪਾਏ ਮੋਹ ਮਗਨ ਲਪਟਤ ਰਹੇ ਹਾਂ ਹਾਂ ਆਵੇ ਜਾਂ। ਆ ਮੋਹ ਮਗਨ ਮੋਹ ਦੇ ਵਿੱਚ ਮਗਨ ਰਹੇ ਨੇ ਲਪਟਿਆ ਦੇ ਵਿੱਚ ਹਾਂ ਹਾਂ ਕਰਦਾ ਰਹੇ ਨੇ ਜਮਣ ਮਰ ਜਪਿਆ ਰਹੇ ਨੇ တဲတဲတဲတ अब ठै परे, परे साद जना शरण दुख के फाहे काटिया नानक लिए समाए तဲတဲတဲ जेडे कहन लग जांदे ने होली होली ना हार बनन लग जांदे ने बन्दीवा होण लग जांदा अब ठै परे बिल्कुल ठै परे नानक गरीब ठैतेया द्वारे सारे जना शरण आए पे ਰੰਕਾਰ ਛੱਡ ਦਿੱਤਾ ਆਪਣੀ ਮਤ ਤਿਆਗ ਤੀ ਦੁੱਖ ਦੇ ਭਾਇ ਕਾਟੇਲ ਨਾਨਕ ਲਈ ਸਮਾਏ ਦੁੱਖ ਦੇ ਭਾਇ ਜਦ ਕੱਟੇ ਗਏ ਨਾਨਕ ਕਹਿੰਦਾ ਉਹ ਆਪਣੇ ਬੋਲ ਹੈ ਜੀ ਸਾਧ ਦੇ ਵਿੱਚ ਦਾ ਵਿਦੇਸ਼ ਢੱਡੇ ਅੱਖਰ ਦਾ ਮਹੱਲਾ ਪੰਜਵਾਂ ਦਾ ਸਮਾਪਤ ਹੈ ਜੀ ਤੇ ਢੱਡੇ ਅੱਖਰ ਤੋਂ ਵੀ ਉਪਦੇਸ਼ ਇਹੀ ਹੈ ਕਿ ਢੂੰਡਣਾ ਪੈਣਾ ਜਿਹਨੂੰ ਢੂੰਡਣਾ ਉਹ ਵਿੱਚੇ ਹੀ ਹੈ ਗੁਰੂ ਜੀ ਤੇ ਗੁਰਨਾਥ ਸਾਹਿਬ ਦੱਸ ਹੁਕਮ ਦੀ ਗੱਲ ਵੀ ਜਿਹੜਾ ਹੁਕਮ ਦੇ ਨਾਲ ਢਾਉਣਾ ਤੇ ਉਸਾਰਨਾ ਚੱਲ ਰਿਹਾ ਤੇ ਉਹਦੇ ਹੁਕਮ ਦੇ ਵਿੱਚ ਸਾਰਿਆਂ ਨੂੰ ਚੱਲਣਾ ਪੈਂਦਾ ਫੇਰ ਪੰਜਵੇਂ ਪਾਤਸ਼ਾਹ ਨੇ ਦੱਸਿਆ ਵੀ ਢੂੰਡਣਾ ਕਿਵੇਂ ਹੈ ਵੀ ਸੰਗੀ ਤੁਹਾਰੇ ਪ੍ਰਭ ਅਸੈ ਬਨ ਬਨ ਕਹਾ ਫਿਰਾਏ ਆਪਣੇ ਅੰਦਰ ਹੀ ਢੂੰਡਣਾ ਹੈ ਕਿਤੇ ਬਾਹਰ ਇਸ ਤਰ੍ਹਾਂ ਦੀ ਭਗਤੀ ਨੂੰ ਗੁਰਮਤ ਨਹੀਂ ਮੰਨਦੀ ਇੱਥੇ ਠੱਡੇ ਅੱਖਰ ਦਾ ਉਪਦੇਸ਼ ਦੀ ਸਮਾਪਤੀ ਹੈ ਜੀ